हर, का हर के नाम जन को मुक्ति जुक्ति हर के नाम जन को तृप्ति उपति हर के नाम आकींदा जन को मुक्ति जुक्ति मुक्ति जुक्ति इससे की दया इससे हर के नाम जन को तृप्ति उपति बोल भक्त है यदि मुक्ति दे पे हर के नाम जन को तृप्ति उपति तृप्ति उपति त्रिशण सिर्फ रहनवासे पदार्थ है उपभोग ज्ञान खाने वाली चीज को कभी सिर्फ उप करने वाली खुराक है सिर्फ रिप्ति कुक्ति हर का नाम जन का रूप रंग हर का नाम जन का रूप रंग रूप ये रप लिए और नाम जप तब परे ना पर ਹਰ ਨਾਮ ਦੇ ਅਫਸਰ ਕੋਲ ਜਵਾਬ ਹੁੰਦਾ। ਬਣ ਅੱਜ ਟਾਈਮ ਆਡਲ ਕੀ ਪਹੁੰਚਾ ਕੇ ਸਰ ਬੁੱਸਰ ਡਿਵਾਈਡ ਹੋ ਜਾਣਾ। ਵਕਰਾ ਜਿੰਨਾ ਜਿਹੜਾ ਨਾਮ ਜ਼ਾਬਦਾ ਰਹੂਗਾ। ਪੰਨਾ ਪਹਿਲੀ। ਪਹਿਲਾ ਵੀ ਦੇ ਵਿੱਚ। ਉਪਦਰਨ ਫੇਰਨ ਪਾਉਂਦੇ। ਹਰ ਕਾ ਨਾਮ ਜਨਕੀ ਵਡਿਆਈ। ਹਰ ਕਾ ਨਾਮ ਦੀ ਜਨਕੀ ਵਡਿਆਈ। ਜੋ ਜਨਮ ਲੈ ਜਾਂਦਾ ਹੋਵੇ ਅਸਨਾਮ ਉਹਦੇ ਵਿੱਚ ਅਸਨਾਮ ਹਰ ਕੇ ਨਾਮ ਜਨ ਸੋਭਾ ਪਈ ਹਰ ਕੇ ਨਾਮ ਨਾਲੇ ਜਨ ਸੋਭਾ ਪਈ ਚਾਹੀ ਸੱਚੇ ਮਾਰ ਵਿਚ ਲੱਦੇ ਹਾਂ ਸੁਸਰੇ ਜਾਂ ਹਰ ਨਾਮ ਜਨ ਕੋ ਖੋਜੋਗ ਹਰ ਕਾ ਨਾਸੇ ਕੋ ਹਮਾਰ ਜੋ ਲੋਕ ਜਨ ਪ੍ਰਾਗੂਏ ਖੋਗਤ ਲੋਗ ਵੀ ਸਤਾਰਪੁੜੀਏ ਤਾਂ ਵੀ ਹੈ ਪ੍ਰਾਗੂਏ ਤੋਂ ਹਟੇ ਨਹੀਂ ਹਰ ਨਾਮ ਜਨ ਕੋ ਕੁਸ ਮਹਿਉ ਆਪਣਾ ਆਪ ਜਦੈ ਨੂੰ ਕੋਲ ਲਉਗੇ ਜੀ ਜੁੜਿਆ ਹੈ ਨਾ ਤੇ ਜੋਗਾ ਤਾਂ ਵਿయోగ ਨਹੀਂ ਹੈ ਹਮਮ ਵਿయోగ ਹੈ ਤੇ ਜੋ ਕਿਥੇ ਹਮਮ ਉਹ ਜੋਗਾ ਇਸ ਤਰੀਕੇ ਨਾਲ ਹੈ ਜਿਵੇਂ ਆਪਾਂ ਦੋਜ ਵਾੜੇ ਦੇ ਨਾ ਰੋਟੀ ਖਾਦੇ ਨਾ ਦੋਵੇਂ ਮਿਲ ਕੇ ਖਾਦੇ ਜੀ ਜੇ ਜੋਏ ਉਹ ਮਿਲ ਕੇ ਨਾ ਕੰਮ ਕਰਨ ਰੋਟੀ ਵੀ ਲਾਉਂਦੇ ਕੋਲੋਂ ਰੋਟੀ ਜਿਹੋ ਗੋਬਨੋ ਘਣੋ ਖਾਜੀ ਸਕਦੇ ਕੋਗੋ ਕੋਗਦਾ ਜੋਗ ਦੇ ਮੇਰੇ ਕੋ ਹੋਏ ਖਾਈ ਤੇ ਜਿਹਨਾਂ ਦੇ ਵਿਚਾਰ ਕਰਾਂਗੇ ਉਹਨਾਂ ਬਿਆਨ ਜਿਉਂ ਨਹੀਂ ਹੋ ਗਿਆ ਮੇਰੇ ਕੋ ਸਮਾਂ ਨਹੀਂ ਇਹਗਾ ਕੋਗਦ ਨਾਲ ਜੋਗ ਦਾ ਸਮਝ ਆਇਆ ਹਾਂ ਹਾਂ ਗੋਗਨਾ ਜੋਗ ਦਾ ਹਾਂ ਇੱਕ ਇਹ ਆਪਾਂ ਨੇ ਵਿਚਾਰਿਆ ਇਹ ਜਿਵੇਂ ਆਪਾਂ ਦੋੇ ਕਰੋਸ਼ੀ ਘਰ ਦੇ ਬਾਹਰ ਛਿੜ ਦੋੇ ਚੱਲਦੇ ਉਹ ਸਿਰਫ ਆਮ ਲੋਕ ਸਭ ਅੱਧਰ ਪਤਾ ਹੁੰਦਾ ਕਿ ਕਿਵੇਂ ਜੀਵ ਜਗ ਦਾ ਸਭ ਜੋ ਫੰਕਸ਼ਨ ਆਪੇ ਚੱਲਦਾ ਆਪਾਂ ਕੋ ਲੱਗ ਜੀ ਫਿਰ ਉਹ ਕਿਹੜਾ ਅਰਜੋਗ ਆ ਹੋਗਣ ਜੋਗ ਆ ਖਰਾਕ ਅਰਜੋਗ ਆ ਦੋਖੀ ਲੋੜ ਆ ਦੋਹਾਂ ਦੇ ਖਰਾਕ ਆ ਹੂੰ ਉਹ ਜੋਗ ਜੋਗ ਤੇ ਬਣੂਗਾ ਖਰਾਕ ਨਹੀਂ ਹੋ ਸਕਦਾ ਕੋਰ ਸਰਕਾਰ ਨਾਮ ਜਾਣ ਕੋ ਭੋਗ ਜੋਗ ਹਰ ਨਾਮ ਜਬ ਕੁਛ ਨਹੀਂ ਬਿਓ ਹਰ ਨਾਮ ਜਬ ਕੁਛ ਨਹੀਂ ਬਿਓ ਨਾਮ ਜਪਦਾ ਹੋਵੇ ਤਾਂ ਕੋਈ ਵਿయోగੇ ਲੋਕਾ ਦਾ ਜਪੈ ਨੇ ਜਿ ਵਿయోగ ਜਪੈ ਜਿਓ ਸਰਬਜਾ ਦੀ ਆਸਰ ਦਾ ਮਹਿਮਾਨਤ ਬਸ ਚਲਾ ਰਿਹਾ ਸਮਝੋ ਸਿਬਦੋ ਕੋਈ ਨਹੀਂ ਜਿਵੇਂ ਆਉਣਾ ਨਹੀਂ ਦਵਣ ਮਿਲਣੀ ਮੈਨੂੰ ਹਾਂ ਫਿਰ ਮਿਲਦਾ ਨਹੀਂ ਕੋਈ ਜਨ ਰਾਤਾ ਹਰ ਨਾਮ ਦੀ ਸੇਵਾ ਨਾਨਕ ਪੂਜੇ ਹਰ ਹਰ ਦੇਵ ਜਨ ਰਾਤਾ ਨਾਮ ਦੀ ਸੇਵਾ ਜੰਨ ਰਹਾ ਹੈ ਉਹਦਾ ਰੰਗ ਰਿੜਾ ਚਲ ਰਹਾ ਹਰ ਲੋਕ ਦੀ ਸੇਵਾ ਕਰਦਾ ਜਦੋਂ ਉਸ ਦੀ ਸੇਵਾ ਕਰਦਾ ਹੁੰਦਾ ਜੰਨ ਰਹਾਤਾ ਹਰ ਨਾਮ ਦੀ ਸੇਵਾ ਸੇਵਾ ਹਰ ਹਰ ਦੇਦਾ ਹਰ ਨਾਮ ਦੀ ਜਿਹੜੀ ਸੇਵਾ ਹੈ ਉਹਦਾ ਰੰਗ ਚੜਦਾ ਜੇ ਮਨ ਨੂੰ ਹਰ ਹਰ ਦੇਦਾ ਹਰ ਹਰ ਇਹ ਕਰਕੇ ਹਰ ਹਰ ਦੇਵਾ ਚਲ ਰਿਹਾ ਉਹਦੇ ਸਾਹਮਣੇ ਤਨ ਮਨ ਸਾਹੂ ਉਜੇ ਹੁੰਦਾ ਹੈ ਜੋ ਹਰ ਹਰ ਦੇ ਤਨ ਕੋ ਤਨ